ਸਰੋਕ ਮਾਲਾ ਤੀਜਾ ਸਭਨਾ ਕਾ ਸ਼ੋ ਇੱਕ ਹੈ ਵਧ ਹੀ ਰਹੇ ਹਜ਼ੂਰ ਨਾਨਕ ਹੁਕਮ ਨ ਮੰਨਈ ਤਾਂ ਘਰ ਹੀ ਅੰਦਰ ਦੂਰ ਸਭਨਾ ਦਾ ਇਸ਼ਕ ਹੈ ਦੇਦੇ ਅਸਲ ਵਿੱਚ ਲਾਹੂਰ ਇਹ ਜਿਹੜਾ ਨਾ ਇਹ ਉਚਾਰਨ ਕਰਦੇ ਸ਼ੋ ਸ਼ੋ ਹੈ ਅਸਲ ਵਿੱਚ ਉਰਦੂ ਵਾਲੇ ਦਾ ਲਫ਼ਜ਼ ਆਪਾਂ ਪੰਜਾਬੀ ਸ਼ੋ ਕਹਿੰਦੇ ਦੀ ਸ਼ੋੜਾ ਸਾਰੇ ਸਹੁਰੇ ਦੇ ਜਾਂਦੇ ਸੋ ਬੈਠਣ ਸੋ ਉਹਨਾਂ ਦਾ ਲੱਗਦਾ ਹੈ ਹੋਏ ਉੱਥੇ ਜ਼ਰੂਰ ਹੈ ਪਰ ਉਹ ਚੱਲ ਸਾਡਾ ਸਾਰੇ ਸਭਨਾ ਦਾ ਸੋ ਇੱਕ ਹੈ ਸਾਦੇ ਹੀ ਰਹੇ ਹਜ਼ੂਰ ਸਾਦੇ ਹੀ ਰਹੇ ਹਜ਼ੂਰ ਸਾਦਾ ਹਜ਼ੂਰ ਰਹਿੰਦੇ ਸਾਰੇ ਹਾਂ ਚੱਲ ਬੋਲ ਉਹ ਬਾਹਰ ਤੇ ਸਭਨਾ ਦਾ ਸੋ ਜੇ ਕਹਾਂਗੇ ਫਿਰ ਹੁਕਮ ਨੂੰ ਕਹਾਂਗੇ ਹੁਕਮ ਨਾਲ ਹੈ ਸਾਰੇ ਦੇ ਹੁਕਮ ਇਹ ਤਾਂ ਆਪਣਾ ਆਪਣਾ ਹੁੰਦਾ ਹੈ ਨਾ ਗੁਰੂ ਦਾ ਆਪਣਾ ਗੁਰਪੁਰ ਦੀ ਕਿਹਾ ਕਿ ਤੇ ਆਪਣਾ ਆਪਣਾ ਹੁੰਦਾ ਹੈ ਅੱਛਾ ਉਹ ਪਿਆਰੇ ਨਾਲ ਉਸ ਤੇ ਕੋਈ ਨਹੀਂ ਤੇ ਇਹ ਫਿਰ ਉਦੋਂ ਗੱਲ ਹੋ ਰਹੀ ਹੁਕਮ ਦੀ ਸਭਨਾ ਕਾ ਸਹ ਇੱਕ ਹੈ ਸਦੀ ਦਾ ਸ਼ਬਦ ਦਾ ਫਿਰ ਨਾਨਕ ਹੁਕਮ ਨਾ ਮੰਨਈ ਤਾਂ ਘਰ ਹੀ ਅੰਦਰ ਦੂਰ ਆਬਾਜ਼ਾ ਅਤਲੀ ਨਾਨਕ ਦੇ ਹੁਕਮ ਨੂੰ ਬੰਦੀ ਨਾਲ ਤਾਂ ਹੁਕਮਤਾਂ ਅਧਰ ਵਿੱਚ ਹੈਗਾ ਦੋ ਦਿਨ ਦਾ ਅਬਰਕ ਪ੍ਰਭਾਨੋਗ ਦੇ ਹੀ ਬੇਸਕਾ ਦੂਰ ਹੈ ਜਬਦਲੀ ਠੀਕ ਹੈ ਜੀ ਹੁਕਮ ਵੀ ਤੇਨਾ ਮਨਾਏ ਸੀ ਜਿੰਨ ਕੋ ਨਦਰ ਕਰੇ ਹੁਕਮ ਮਨ ਸੁਖ ਪਾਇਆ ਪ੍ਰੇਮ ਸੁਹਾਗਣ ਹੋਏ ਜੇ ਤੇ ਬੇਦੀ ਕਰਦੇ ਨਜ਼ਰ ਤਾਂ ਸਾਰਿਆਂ ਲਈ ਹੈ ਕਿਸੇ ਤੇ ਥੋੜੀ ਜਿਹੀ ਤੇ ਕਢੇਰੀ ਜੇ ਕਢੇਰੀਆਂ ਦਾ ਤਾਂ ਅੱਛਾ ਜੀ ਹੁਕਮ ਪੀਤਰਾ ਮਨਾਇ ਸੀ ਜਿੰਨ ਜੇ ਕੰਢੀਰੀ ਉਹਦੀ ਦ੍ਰਿਸ਼ਟੀ ਖੜ ਦੇ ਪੂਰੀ ਬਲੰਦ ਕਰ ਦੇ ਹੁਕਮ ਬੋਲਦੇ ਨੇ ਨਾਲੇ ਐਸੀ ਕੋਈ ਗੱਲ ਸੁਖ ਪਾਇਆ ਪ੍ਰੇਮ ਸੁਹਾਗਣ ਹੋਏ ਹੁਕਮ ਮੰਨ ਸੁਖ ਪਾਇਆ ਹੁਕਮ ਨੂੰ ਬਣ ਕੇ ਹੀ ਸੁਖ ਪਾਇਆ ਨਹੀਂ ਤੇ ਪਾਇਆ ਬੰਦੇ ਨੰਦੇ ਨੂੰ ਫਿਰ ਬੰਦ ਕੇ ਹਾਂ ਸੁਖ ਪਾਇਆ ਸੁਖ ਦੀ ਪ੍ਰਾਪਤੀ ਹੋਈ ਹੈ ਜਿਹਨੂੰ ਹੋਈ ਹੈ ਅੱਜ ਤੱਕ ਬਿਨਾ ਹੁਕਮ ਨੇ ਤੇ ਸੂਰ ਦੀ ਪ੍ਰਾਪਤੀ ਨਹੀਂ ਹੋਈ ਇਹਦਾ ਮਤਲਬ ਹੈ ਵਕਤੀ ਜਿੰਦੀਆਂ ਵੀ ਸਾਰੀਆਂ ਉੱਤਨ ਦੇ ਸਾਰੀਆਂ ਕਲਮ ਫੇਰਦੀਆਂ ਜਿਹੜੀਆਂ ਉੱਤਾਂ ਹੁਕਮ ਦੀ ਗੱਲ ਹੀ ਕਰਦੀਆਂ ਜਿਹੜੀਆਂ ਅੱਥਾ ਸਿਰਫ ਝਪਣ ਦੀ ਗੱਲ ਕਰਦੀਆਂ ਜੇ ਲੋਕ ਝਪਣ ਲੋਕ ਝਪਣ ਤੋਂ ਸੋਖ ਦਈ ਹੈ ਉਹ ਜੋਕ ਹੋਰ ਹੈ ਲੋਕ ਝਪਣ ਤੋਂ ਲੋਕ ਝਪਣ ਨਾਲ ਹੁੰਦਾ ਤੋ ਕਾਲ ਤੋ ਛੁਟਕਾਰਾ ਹੁੰਦਾ ਨਾਮ ਜਪਣ ਨਾਲ ਸੁਖ ਦੀ ਪ੍ਰਾਪਤੀ ਦਾ ਹਾਂ ਸਦਾ ਸੁਖ ਦੀ ਪ੍ਰਾਪਤੀ ਇਹਦੇ ਤੋਂ ਸਦਾ ਸੁਖ ਅੱਛਾ ਜੀ ਨਾਮ ਜਪਣਾ ਮਤਲਬ ਹੁਕਮ ਬੁੱਝਣਾ ਤੇ ਜਦੋਂ ਹੁਕਮ ਉਹ ਬੁੱਝਿਆ जिन प्यारा पुरख हर राव सारी जिंदगी अज्ञातता देवे जल्दी मुक्ति अज्ञातता विच प्रेम सत्र आन प्रेम दी कीता हम्म ओदा सुख वसन सुहागणे जिन प्यारा पुरख हर राव ਹਰ ਦੁਰਵਾ ਉਹ ਸੁਆਦ ਬਣੀ ਇਹਦੇ ਸੋਹਣਾ ਵਸੇ ਇਹਦੇ ਜੀਤੇ ਪਿਆਰਾ ਆਪਣਾ ਪੁਰਖ ਹਰ ਰੋ ਰੂਗਲੇ ਉਤਰ ਆਤਮ ਨੂੰ ਪਿਆਰਾ ਪੁਰਖ ਬੁਜੇ ਆਪਣੇ ਨੂੰ ਪਿਆਰਾ ਪੁਰਖ ਬੁਜੇ ਉਹਦਾ ਹੁਕਮ ਸੁਖਦੇ ਠੀਕ ਹੈ ਜੀ ਪੌੜੀ ਸਭ जग ਫਿਰ ਮੈਂ ਦੇਖਿਆ ਹਰ ਇੱਕੋ ਦਾਤਾ ਉਪਾਇ ਕਿਤਨਾ ਪਾਈ ਹੈ ਹਰ ਕਰਮ ਵਿਝਾਤਾ ਸਭ ਜਗ ਫਿਰ ਮੈਂ ਸਾਰੇ ਜਗ ਤੁਰ ਕੇ ਦੇਖਦੇ ਆਂ ਦਾਤਾ ਹਰ ਇੱਕੋ ਹੀ ਹੈ ਕਿਤੇ ਹਰ ਹਰ ਦਾ मतलब ਜੋਤ ਸਰੂਪ ਉਹ ਦਾ ਜੋਤ ਜਿਹੜਾ ਜੋਤਿਆ ਜੋਤ ਸਰੂਪ ਅੱਛਾ ਜੀ ਇੱਕੋ ਹੀ ਦਾਤਾ ਹੈ ਉਹ ਕੌਣ ਹੈ ਉਹ ਹੁਕਮ ਸੱਚਖੰਡ ਦਾਤਾ ਹੈ ਸਭ ਨੂੰ ਸੱਚਖੰਡ ਤੋਂ ਹੀ ਮਿਲਦਾ ਜੋ ਮਿਲਦਾ ਠੀਕ ਹੈ ਜੀ ਹੁਕਮ ਨਾਲ ਦਾਤਾ ਹੁਕਮ ਨਾਲ ਸਭ ਕੁਝ ਹੁੰਦਾ ਉਪੀ ਜਦ ਥੜੀ ਗਿਆ ਇੱਕ ਪੜਾਈਆ ਨਾ ਕੋਈ ਜੀ ਉਪਾਏ ਕਿਤੇ ਨਾ ਪਾਈਏ ਹਰ ਕਰਮ ਵਿਦਾਤਾ ਅਜੇ ਉਪਾਏ ਕਰਦੇ ਨੇ ਗੁਰੂ ਪ੍ਰਾਪਤੀ ਦੇ ਵਾਅਦੇ ਕਰਦੇ ਨੇ ਲੋਕ ਜਲਤਾਰੇ ਕਰਦਾ ਕੋਈ ਜੱਗ ਕਰਦਾ ਕੋਈ ਕੋਸ਼ ਕਰਦਾ ਕੋਈ ਤੀਰਥ ਯਾਤਰਾ ਕਰਦਾ ਇਹ ਉਪਾਏ ਨੇ ਉਪਾਏ ਦੇ ਕੋਈ ਐਸਾ ਉਪਾਏ ਨਹੀਂ ਜਿਹੜੇ ਉਪਾਏ ਜਾਂਦੇ ਪਰ ਜਦੋਂ ਧਿਆਨ ਧਿਆਨ ਦੇ ਨਾਲ ਉਹਦੇ ਨਾਲ ਜੁੜ ਜਾਂਦਾ ਧਿਆਨ ਦੇ ਵਿੱਚ ਆ ਜਾਂਦਾ ਸਮਝ ਆ ਜਾਂਦਾ ਉਹਦੇ ਨਾਲ ਜੁੜ ਜਾਈਦਾ ਉਹਦੇ ਨਾਲ ਇੱਕ ਮਿੰਟ ਹੋ ਜਾਈਦਾ ਇਹ ਤੁਹਾਨੂੰ ਨੂੰ ਪਤਾ ਹੈ ਪਰ ਹੋਰ ਕੋਈ ਕਰਮ ਜਾਂ ਤੋਂ ਬਿਨਾ ਹੋਰ ਕੋਈ ਕਰਮ ਹੈ ਉਸੇ ਗੱਲ ਨੂੰ ਕਰਮ ਬਿਦਾਸ ਜਿਹਦੇ ਹੱਥੇ ਜੱਗਣ ਨਾਲ ਕਰਮ ਬਿਦਾਸਾ ਉਹੀ ਹੈ ਗੁਰ ਸ਼ਬਦੀ ਹਰ ਮਨ ਵਸੈ ਹਰ ਸਹਜੇ ਜਾਤਾ ਗੁਰ ਸ਼ਬਦੀ ਗੁਰਪ੍ਰਦੇਸ ਨਾਲ ਹਰ ਬੁੱਲ ਦੇ ਵਿੱਚ ਵਸ ਜਾਂਦਾ ਉਹ ਅੱਗੇ ਨਾ ਫਿਰ ਉਹੀ ਗੱਲ ਗੁਰਪ੍ਰਦੇਸ ਹੈ ਜਿਹੜਾ ਇਹਦੇ ਇਹਦੇ ਨਾਲ प्राप्तिक हो जाती है हर मन बसाया हर मन बसे बड़ी बसे बोल विच बसता है कौन यानी असल दे विच बसता है बोले हर दिन और बोल चंद अंदर उपधारो इसको इधर वो भी बड़ी असर से गुण बसाया ਈਵਨ ਜੁੜ ਕੇ ਟਿਕਿਆ ਪਤਾ ਲੱਗਾ ਵੀ ਇਹ ਚੀਜ਼ ਜਦੋਂ ਜੋਤ ਨਾਲ ਜੁੜ ਕੇ ਟਿਕਿਆ ਆਪਣੇ ਗੋਲ ਨਾਲ ਜੁੜ ਕੇ ਟਿਕਿਆ ਜੋਤ ਜਦੋਂ ਟਿਕਦੀ ਜੁੜ ਕੇ ਟਿਕਦੀ ਹੈ ਅੰਦਰੋਂ ਤ੍ਰਿਸ਼ਨਾ ਅਗਨ ਬੁਜੀ ਫਰ ਅੰਮ੍ਰਿਤ ਅੰਦਰੋਂ ਤ੍ਰਿਸ਼ਨਾ ਅੰਦਰੋਂ ਜਦੋਂ ਤ੍ਰਿਸ਼ਨਾ ਦੀ ਅਗ ਬੁਝ ਜਾਂਦੀ ਹੈ ਇਹ ਸਮਝ ਲਓ ਅੰਗਰੇਜ਼ ਕਰੋਬਰ ਜੈਸਾ ਹੋ ਗਿਆ ਉਧਰਾ ਦ੍ਰਿਸ਼ਨਾ ਅਦਨ ਭੂਜਨ ਨਾਲ ਗਈ ਇਹ ਬਦਸਰਤ ਅਸੀਂ ਦੋ ਦਿਨ ਵੱਲ ਨਹੀਂ ਹੈ ਉਹ ਤਾਂ ਸਰੋਵਰ ਨਾਲ ਹੀ ਚੰਗਾ ਜਿਆਦਾ ਸੀ ਹਾਂਜੀ ਅਜੇ ਤਾਂ ਕੁਝ ਵੀ ਨਹੀਂ ਸੀ ਅਜੇ ਤਾਂ ਗੋਇੰਦਵਾਲ ਸਾਹਿਬ ਦੀ ਗੱਲ ਹੈ ਜਿਹਦਾ ਨਾਲ ਸਲਾਹ ਬਣੀ ਉੱਥੇ ਜਾ ਕੇ ਇਦਾਂ ਆਪਾਂ ਇੱਥੋਂ ਆੜ ਕੇ ਉੱਥੇ ਜਾਣਾ ਚਾਹੀਦਾ ਉਹ ਵੀ ਚਾਹੇ ਦੀ ਸਲਾਹ ਬਣੀ ठीक है ये नो जोड़ दिए चक हां जी ए भक्ति नो पसल नो जोड़ दिए कितनी बड़ी गलती है नाले ए अमृतसर त अंदर है जी ए अब्ब साहब त्रिशनाग हमने बोल रहे हैं अमरसर ठीक है जी अमृतसर सरोवर पैदा हो गया अंदर क्योंकि त्रिशनागन बुझ गया अगर हो गई कोई आता पार रहूंगा ਯਾ ਵੀ ਨਾ ਬਰੋ ਹੂਗਾ ਦੋਅ ਦੇ ਕਰੂਗਾ ਹੂੰ ਬੇ ਨੋ ਬੇ ਨਾ ਵਿਰੋਧ ਹੈ ਪਹਿਲਾਂ ਹੰਕਾਰ ਸੀ ਇਹਦਾ ਰੋਗ ਆ ਕੀ ਗੁਰਮੁਖੀ ਬੁਲਾਤਾ ਵੱਡੀ ਵਡਿਆਈ ਵੱਡੇ ਕੀ ਛੇ ਵਡਿਆਈ ਆ ਵੱਡੇ ਕੀ ਵੱਡੀ ਵਡਿਆਈ ਵੀ ਵੱਡੀ ਵੱਡੇ ਕੀ ਗੁਰਮੁਖੀ ਬੁਲਾਤਾ ਗੁਰਮੁਖਾਦੋ ਤਾਂ ਬੁਲਾਉਂਦਾ ਉਹ ਵੱਡਾ ਉਹ ਕਹਿੰਦਾ ਵੀ ਐ ਬੋਲੋ ਗੁਰੂਆਂ ਦੀ ਕਿਤਾਬ ਬੋਲਦੇ ਨੇ ਗੁਰੂ ਘਰ ਦੀ ਕੋਈ ਬੜਿਆਈ ਨਹੀਂ ਜਿਵੇਂ ਕਹਿੰਦਾ ਬੋਲਦਾ